ਸ਼ਲੋਕ ਮਹੱਲਾ ਤੀਜਾ ਹੋਮੇ ਜਲਤੇ ਜਲਮੂਏ ਭ੍ਰਮ ਆਏ ਦੂਜੇ ਪੂਰੇ ਸਤਗੁਰ ਰਾਖ ਲੀਏ ਆਪਣੇ ਪਾਈ ਉਹ ਬੇ ਜਲਤੇ ਜਲਮੂਏ ਜਿਹੜੇ ਹੰਕਾਰ ਦੇ ਜਲਦੇ ਤੇ ਮਰ ਗਏ ਕੋਈ ਮਰੇ ਗਏ ਠੀਕ ਹੈ ਜੀ ਭ੍ਰਮ ਆਏ ਦੂਜੇ ਭਾਈ ਕਿਉਂਕਿ ਉਹ ਮਾਇਆ ਦੇ ਭਾਇਆ लागे उल्टे पाछे लागे ਆਪਣੇ ਸਨਮੁਖ ਦੀਏ ਹੈ ਸਤਿਗੁਰ ਤੇ ਗਰਭ ਦੇ ਵਿੱਚ ਸਨਮੁਖ ਤੇ ਉਸ ਪਰਮ ਦੇ ਉਲਟੇ ਪਾਸੇ ਹੋ ਗਏ ਪਿੱਟ ਕਰਨ ਦੀ ਤੇਰਾ ਅਸਣ ਵੱਲ ਨੇ ਅੱਖਾਂ ਅਰ ਕੰਨਾਂ ਦੇ ਸੰਸਾਰ ਦੇ ਸੰਸਾਰ ਦੇ ਜੁੜੇ ਰਹੇਗੇ ਰਮਾਇ ਦੂਜੇ ਪਾਏ ਦੂਜੇ ਪਾਏ ਦੀ ਦੂਜੀ ਤੁਖਤਾਂ ਜਾਉਗੀ ਦੂਜੇ ਸਰੀਰ ਦੀ ਬਾਹਰਲੇ ਸਰੀਰ ਦੀ ਤੁਖਤ ਪੈ ਜਾਉਗੀ ਅੰਦਰਲੇ ਸਰੀਰ ਦੀ ਤੁਖਤ ਲੈ ਕੇ ਆਇਆ ਸੀ ਬਾਹਰਲੇ ਦੀ ਤੁਖਤ ਵਿੱਚ ਫਸ ਗਿਆ ਬਾਹਰਲੇ ਦੀ ਤੁਖਤ ਵਿੱਚ ਫਸਿਆ ਬਾਹਰੇ ਰਹਿ ਗਿਆ ਨਾਲੇ ਦੀ ਕੁਖ ਬਾਰਨ ਪੈਦਾ ਹੋਣੀ ਸੀ ਫਾਰਮ ਦਾ ਮਤਲਬ ਹੈ ਦਿੱਕਾਰਾ ਹੋਣਾ ਸੀ ਕੁਖ ਦੂਰ ਹੋਣੀ ਸੀ ਕੁਦਰਤ ਨਾਲ ਉਹ ਪਤਾ ਕਿ ਫਸ ਕੇ ਰਹੇ ਪਰਮਾਇ ਦੂਜੇ ਪਾਏ ਪ੍ਰਪਤ ਦੂਜੇ ਸੀ ਜਿਵੇਂ ਤੋਤਾ ਹੁੰਦਾ ਛੜ ਦੇ ਡਣਕੀ ਤੇ ਬਹਿ ਜਾਂਦਾ ਕੁਖ ਜਦਿਆਂ ਨਾਲ ਕੀ ਥੱਲੇ ਨੂੰ ਹੋ ਜਾਂਦਾ ਤੋਤਾ ਉਲਟਾ ਲਟਕਣ ਲੱਗ ਜਾਂਦਾ ਆਹਾਂ ਤਰਫ ਕੇ ਪਾਸੇ ਚੱਲ ਜਾਂਦਾ ਪੂਰੇ ਸੱਤ ਵਰ ਰੱਖ ਲੀਏ ਆਪਣੇ ਪਰਦੇ ਪਾਏ ਕੁਝ ਐਸੇ ਨੇ ਅਸੀਂ ਕਹਿੰਦੇ ਪੂਰਾ ਸਤੂਰ ਮਿਲ ਰਖ ਲੈ ਕੋਈ ਪੂਰਾ ਸਤੂਰ ਮਿਲ ਗਿਆ ਤੀਜੇ ਪਾਸ਼ਾ ਕਹਿ ਰਿਹਾ ਨਾ ਗੁਰਮੁਖ ਸਾਹਿਬ ਕੋਈ ਮਿਲ ਗਿਆ ਜੀ ਸੱਚ ਦਾ ਗਿਆਨ ਪੂਰਾ ਸੀ ਨਾ ਵਾਕਈ ਗਿਆਨ ਸੀ ਉਹ ਮਿਲ ਗਿਆ ਸਾਨੂੰ ਉਹਨੇ ਵਿਚਾਲਿਆ ਨਹੀਂ ਤਾਂ ਮੜਾ ਫੇਰ ਸੀ ਆਪਣੇ ਬੰਦੇ ਪਾਏ ਆਪਣੇ ਲੜ ਲਾ ਲਏ ਆਪੋ ਪਰਦੇ ਕਹਿੰਦੇ ਨਾ ਪਰਦੇ ਪਾਏ ਇਹ ਆਣਾ ਆਪਣੇ ਲਾੜ ਲਾ ਲੇ ਆਪਣੇ ਲਾੜਾ ਕੇ ਰੱਖ ਦੇ ਸਾਡੀ ਭਾਈ ਇੱਧਰ ਆ ਜਾਓ ਤੁਸੀਂ ਆਹ ਹੈ ਤੋ ਗਿਆਨ ਦੇਤਾ ਸਾਖੀ ਦਾ ਹੋਜੀ ਇਹ ਜਗ ਨਜ਼ਰੀ ਆਇਆ ਗੁਰ ਕਾ ਸ਼ਬਦ ਸੁਭਾਏ ਸ਼ਵਰਤੇ ਸੇ ਸੀਤਲ ਪਾਏ ਨਾਨਕ ਸੱਚ ਕਮਾਏ ਜਗ ਤਾਂ ਸਾਰਾ ਜਾਣਦਾ ਪਰ ਕਹਿੰਦੇ ਸਾਰੇ ਨੇ ਜਾਣਦਾ ਕਰਦਾ ਇਹ ਜਾਂ ਤੇ ਗਲਤਾਂ ਨਜ਼ਰੀ ਆਇਆ ਸਾਹਮਣੇ ਦਿਖਣ ਲੱਗਿਆ ਮੇਰੇ ਅੱਖੇ ਜਲਦਾ ਗੁਰਮੁਖੀ ਨਜ਼ਰੀ ਆਇਆ ਇਹ ਗੁਰਮੁਖੀ ਨੂੰ ਕਿਸ ਨੂੰ ਦਿਖਦਾ ਜਾਂਦਾ ਕਹਿੰਦੇ ਸਾਰੇ ਇਹਦੇ ਜਿਹਨੂੰ ਦਿਖ ਜਾਂਦਾ ਉਹ ਨਹੀਂ ਜਾਂਦਾ ਪਿੱਛੇ ਵਾਪਸ ਮੁੜਿਆ ਜਿਹਨੂੰ ਦਿਖ ਜਾਂਦਾ ਵਾਪਸ ਹੋੜਿਆ ਹੁੰਦਾ ਜਿਹਨੂੰ ਰਹਿਦੀਦਾ ਕਹਿੰਦਾ ਰਹਿੰਦਾ ਮਿਲਦਾ ਵੀ ਰਹਿੰਦਾ ਇਹ ਕਹਿੰਦੇ ਗਲਤਾਂ ਨਜ਼ਰੀ ਆਇਆ ਕਿਵੇਂ ਆਇਆ ਗੁਰ ਸ਼ਬਦ ਸੁਆ ਗੁਰਤਾ ਸ਼ਬਦ ਉਪਦੇਸ਼ ਸੁਣਿਆ ਨਾ ਕੰਗੀ ਭਾਵਨਾ ਨੂੰ ਸੁਣੇਸ ਭਾਈ ਭਾਵਨਾ ਕਰਕੇ ਸੁਣਿਆ ਐ ਬੇਚਿੱਤੀ ਚਿੱਤੀ ਸੁਣਿਆ ਉਹਦੀ ਭਾਵਨਾ ਨੂੰ ਸੁਣ ਸੁੱਖ ਨੂੰ ਸੁਣ ਕੇ ਸਮਝ ਦਾ ਰੰਗ ਚੜ ਗਿਆ ਜੀ ਉਪਦੇਸ਼ ਦਾ ਰੰਗ ਚੜ ਗਿਆ ਨਾ ਉਹ ਜਾਣ ਤੋਂ ਹੋ ਗਿਆ ਜਾਂਦੇ ਦੀਆਂ ਸਿਰ ਉਹਦਾ ਜਲਣ ਬੁਝੀ ਗਈ ਉਹਨੂੰ ਤੂੰ ਕਹ ਯਾਗ ਨਿਕੈਨਾ ਤੂੰ ਐਸੀ ਅੱਗ ਬੁਝੀ ਤੂੰ ਆਉਂਦੇ ਰਹਿ ਗਏ ਦਾਾਨਕਾ ਸੱਚ ਸੁਭਾਏ ਨਾਲ ਕਹਿੰਦਾ ਸੱਚ ਜਿਸ ਸੁਭਾਏੰਦੇ ਕਿ ਜੇ ਪਾਸ਼ਾ ਕੋਲ ਬਰਦਾਸ਼ ਕਰਦੇ ਨੇ ਜੀ ਅਸੀਂ ਸੱਚ ਵਿੱਚ ਸੁਭਾਏ ਏਦਾਂ ਹੀ ਸ਼ਬਦ ਨਾਨਕ ਸੱਚ ਕਮਾਈ ਕਮਾਈ ਕਰਦੇ ਸੱਚ ਨਹੀਂ ਝੂਠ ਦੀ ਗੱਲ ਦੇ ਮਾਇਆ ਦੀ ਕਮਾਈ ਕਰਦੇ ਝੂਠ ਦੀ ਕਮਾਈ ਹੈ ਸੱਚ ਦਾ ਗਿਆਨ ਲੈਣਿਆ ਸੱਚ ਦੀ ਕਮਾਈ ਹੈ ਜਿਹੜਾ ਗਿਆਨ ਪ੍ਰਾਪਤ ਕਰਦਾ ਉਹ ਹੈ ਪ੍ਰਾਪਤੀ ਹੁੰਦੀ ਹੈ ਉਹਦੇ ਵਿੱਚ ਨਾਮ ਕਮਾਈ ਕਰਦੇ ਹਾਂ ਸਤਿਗੁਰ ਸੇਵਿਆ ਆ ਮੋਇਆ ਨਾ ਵਿਸਥਰ ਹੈ ਸੇਈ ਪ੍ਰਕਤ ਸੁ ਦਾ ਸੇਵਿਆ ਸਤਿਗੁਰ ਸਫਲਾ ਸਤਿਗੁਰ ਦੀ ਸੇਵਾ ਉਹ ਨਹੀਂ ਸਫਲ ਹੁੰਦੀ ਹੈ ਸਤਿਗੁਰ ਦੀ ਸੇਵਾ ਹੁੰਦੀ ਹੈ ਜੇ ਕੋਈ ਕਰੇ ਸਤਿਗੁਰੂ ਦੀ ਸੇਵਾ ਸਫਲਾ ਕਿਹੋ ਕਰੇ ਕਿਤਲਾ ਸਤਿਗੁਰ ਦੀ ਸੇਵਾ ਵਰਤੀ ਨਹੀਂ ਜਾ ਸਕਦੀ ਕਦੇ ਜੀ ਸਭਨੇ ਉਹ ਸਤਿਗੁਰ ਸੇਵੇ ਆ ਸਤਿਗੁਰ ਦੀ ਸੇਵਾ ਸਫਲ ਹੋ ਪ੍ਰਵਾਨ ਹੋ ਜਾਂਦਾ ਜਰਗਾ ਪ੍ਰਵਾਨ ਹੋ ਜਾਂਦਾ ਜਾਂ ਸੇਵਾ ਪ੍ਰਵਾਨ ਹੋ ਜਾਂਦੀ ਹੈ ਗੱਲ ਇੱਕੋ ਹੀ ਹੈ ਇਹਨਾਂ ਸਤਿਗੁਰ ਜੀਵਦੇ ਉਹ ਆਣਾ ਵਿਛੜਾ ਜੀਵਦੇ ਦਾ ਜੀਵਦੇ ਆਹ ਇਹਨਾਂ ਨੂੰ ਕਿਸਰੀਆ ਦੀ ਸਤਿਗੁਰ ਉਹਨਾਂ ਨੂੰ ਬਰਿਆ ਤੇ ਵੀ ਵਿਸਰਦਾ ਹੁੰਦਾ। ਮੋਇਆ ਨਾ ਵਿਸਰਦਾ ਹੈ, ਸੇਈ ਪਰਖ ਸੁਣਵਾਉਂਦੇ। ਉਹ ਹੀ ਪਰਖ ਜਿਹੜੇ ਉਹ ਦੇ ਨੇ ਉਹਨਾਂ ਵਰਗਾ ਗਿਆਨ ਹੋਰ ਕਿਤੇ ਜਾਣਕਾਰੀ। ਠੀਕ ਹੈ ਮੋਇਆ ਨਾ ਵਿਸਰੇ ਤੋਂ ਬੋਲੀ ਦੇ ਸਰੀਰ ਚੜ ਜਾਂਦੇ ਨੇ ਫਿਰ ਵੀ ਉਹਨੂੰ ਵਿਸਰਨਾ ਤਾਂ ਗੁੱਦੀ ਕਰਕੇ ਆਤਮਾ ਕਰਕੇ ਆਤਮਾ ਤਾਂ ਨਿਕਲ ਜਾਂਦੀ ਹੈ ਫਿਰ ਵੀ ਵਿਸਰਦਾ ਉਹਨੂੰ ਨੂੰ ਕਦੋਂ ਹੋਇਆ ਠੀਕ ਹੈ ਜੀ। ਕੁੱਲ ਉਧਾਰਾਂ ਆਪਣਾ ਸੋ ਜਨ ਹੋਵੇ ਪ੍ਰਵਾਨ ਜਿਹੜੇ ਜਨ ਆਪਣੀ ਕੁੱਲ ਦਾ ਉਧਾਰ ਕਰਦੇ ਨੇ। ਕੁੱਲ ਕਿਹੜੀ ਐ? ਉਹ ਸਾਡੀ ਕੋਈ ਐ, ਇੱਕ ਬਚਾ ਸਾਰੇ ਜਿਹੜੇ ਆਦਮੀ ਨੇ ਮੰਨਦੇ ਨੇ ਦੂਜੇ ਪੱਤਾਂ ਵਾਲੇ ਬੰਦੇ ਜਿਹੜੇ ਨਹੀਂ ਮੰਨਦੇ ਇਹ ਗੱਲ ਉਹ ਸੰਪਰਦਾਇ ਧਰਮ ਵੀ ਹੋ ਸਕਦਾ। ਧਰਮ ਵੀ ਕੋਈ ਐ। ਸਰਕਾਰ ਦਾ ਬਾਕੀ ਸੰਪਰਦਾਇ ਨੇ। ਉਹਨਾਂ ਨੇ ਕੁਛ ਉਹਨਾਂ ਦਾ ਡਰ ਦੇ ਭਲੇ ਦੀ ਗੱਲ ਦਾ ਤਾਂ ਹੈ। ਉਹਨਾਂ ਦਾ ਪਤਾ ਲੱਗਿਆ ਉਹ ਬਲਾਉੜਾ ਕਰਕੇ ਸਿਰੋਂ ਬੋਲਣ। ਸਾਰਿਆਂ ਤੇ ਉਦਾਸੀ ਦੀ ਗੱਲ ਹੈ ਗੁਰਬਾਣੀ। ਜਿਹੜਾ ਸੁਣ ਲੂਗਾ, ਸੁਖੀ ਲੂਗਾ, ਕਮਾ ਲੂਗਾ, ਖੁਸ਼ੀ ਲੂਗਾ। ਠੀਕ ਹੈ ਜੀ। ਗੁਰਮੁਖ ਮੂਏ ਜੀਵ ਦੇ ਪਰਵਾਨ ਹੈ। ਮਨਮੁਖ ਜਨਮ ਮਰਾਂ ਹੈ ਗੁਰਮੁਖ ਜਣ ਗੁਰਮੁਖ ਜਣ ਉਹ ਜੀਵ ਜਿਹੜਾ ਪ੍ਰਭਾਤ ਨੇ ਜਿਹੜੀ ਜੀਵਨ ਚ ਮਰੇ ਹੋਈ ਹੁੰਦੇ ਨੇ ਅੱਛਾ ਜੀ ਕੀ ਮਰਜੀ ਨੇ ਹੋ ਹੋਇਆ ਮਰਜ਼ੀ ਛੱਡੀ ਹੋਈ ਆ ਨੇ ਹੋ ਠੀਕ ਹੈ ਜੀ ਪਰਵਾਣ ਹੈ ਉਹਨਾਂ ਦਾ ਮਰਨਾ ਪਰਵਾਣ ਹੋ ਗਿਆ ਜਿਉਂਦੇ ਉਹਦਾ ਹੀ ਠੀਕ ਹੈ ਜੀ ਜਿਹਨੇ ਆਪਣੀ ਮਰਜ਼ੀ ਤਿਆਗ ਦਿੱਤੀ ਉਹਦਾ ਦਾ ਮਰਨਾ ਪਰਵਾਣ ਨੇ ਫਿਰ ਬੋਤਲੀ ਹੁੰਦੀ ਹੁੰਦੀ ਚਲਰ ਮਰਿਆ ਮਰਿਆ ਫਰਜੀ ਮਰਨ ਤੋਂ ਮਰਨ ਨੂੰ ਹੋਈ ਪਰ ਮੁਖ ਜਾਮਾ ਮਰ ਮਰਾਈ ਬਨ ਮੁਖ ਜਾਮਾ ਜੰਦ ਦੇ ਬਰਦੇ ਰਹੇ ਉਹਨਾਂ ਦਾ ਮਰਨਾ ਜਿਉਂਦੜੇ ਲਈ ਪ੍ਰਵਾਨ ਹੋ ਗਿਆ ਬਸ ਉਹ ਜਿਉਂਦੇ ਕਹਿੰਦੇ ਕਰੈਕਟ ਆਪਣੀ ਸੱਚਾ ਨਾਮ ਗੱਲ ਉਹ ਕੇ ਆਏ ਨੇ ਦਾ ਹਾਂਜੀ ਜੀਵਦੇ ਹੀ ਹੋਏ ਹੁੰਦੇ ਨੇ ਹੋ ਠੀਕ ਹੈ ਜਿੱਥੇ ਕਹਿੰਦੇ ਸੀ ਜਿੰਨਾ ਸਤਗੁਰ ਜੀਵੰਦਿਆਂ ਮੋਇ ਨਾ ਵਿਸਰੈ ਸਹੀ ਬੋਲਤੋ ਜੀ ਠੀਕ ਹੈ ਉਹ ਉਹ ਚ ਪ੍ਰੈਸ਼ਨ ਕੀਤੀ ਇੱਥੇ ਆ ਨਾਨਕ ਮੂਹੇ ਨਾ ਜੇ ਗੁਰਗੇ ਸ਼ਬਦ ਸਮਾਹ ਹਾਂ ਦੇ ਉਹਨਾਂ ਨੂੰ ਕਹਿੰਦੇ ਨੇ ਇਹੀ ਗੱਲ ਗੱਲ ਲਿਖੀ ਹੈ ਹੁਣ ਕਹੇ ਸਤਿਗੁਰੂ ਹੋਇਓ ਸਕਦਾ ਇਸ ਕਰਕੇ ਉਹਨਾਂ ਦੀ ਵਰਤੀ ਨਹੀਂ ਬਣਾਈ ਜਾ ਸਕਦੀ ਬਰਸੀ ਮਰਿਆਦੀ ਮਨਾਇਆ ਜਾਂਦਾ ਸੀ ਇਹ ਉਹਦੇ ਦੀ ਨਹੀਂ ਮਨਾਇਆ ਜਾਂਦਾ ਸੀ ਪਰ ਅਸੀਂ ਬੁਲਾਈ ਜਾਂਦੇ ਹਾਂ ਗੁਰੂਆਂ ਦੀ ਕਿਉਂ ਮਨੋ ਖਰੋਜ ਹੋਏ ਇਹਨਾਂ ਨੇ ਸਮਝੀ ਲਈਏ ਗਲਤੀ ਹਾਂਜੀ ਜਿਹੜੇ ਗੁਰਕੇ ਖੜ ਕੇ ਸੁਹਾ ਆ ਠੀਕ ਹੈ ਜੀ ਸਾਨੂੰ ਲੋਕ ਕਰਦੇ ਨੂੰ ਅਸੀਂ ਕਰੀਆਂ ਨੇ ਵਿੱਚ ਵੀ ਬਰਸੀ ਮਨਾਉਣਾ ਜਾਂ ਜਨਮ ਮਨਾਉਣਾ ਹਰਾਮ ਕਿਹਾ ਗਿਆ ਜੀ ਪਰ ਅਸਾਨੂੰ ਲੱਗਦਾ ਹਿੰਦੂਆਂ ਤੋਂ ਇਹ ਸੇਧ ਲੈ ਲਈਏ ਜਦੋਂ ਬਾਣ ਕਹਾਵਣ ਮੁਸ਼ਕਲ ਹੋਏ ਤਾਂ ਪੁੱਛਣਾ ਹੈ ਕਿ ਉਹਦਾ ਖੈਗੀ ਉਹਦੀ ਨਹੀਂ ਜੀ ਇਹ ਹੋ ਗਿਆ ਨਾ ਵੀ ਜਨਮ ਅਸ਼ਟਮੀ ਜਦ ਇਹ ਮਨਾਉਂਦੇ ਵੀ ਉਧਰੋਂ ਅਸਰ ਪੈਦੇ ਆ ਹਾਂ ਜੀ ਕੋੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਧਿਆਈਐ ਸਤ ਸੰਗਤੀ ਸਾਧੂ ਲਗ ਹਰ ਨਾਮ ਸਮਾਈਐ ਹਾਂ ਹਰ ਪੁਰਖ ਜਿਹੜਾ ਨਿਰੰਜਨ ਹਰ ਪੁਰਖ ਨਿਰੰਜਨ ਮਾਇਆ ਦੇਖੋ ਪੁਰਖ ਹੈ ਮਾਇਆ ਦੀ ਇਹ ਕਰਕੇ ਜੂਦਾ ਪਰਮੇਸ਼ਰ ਜੂਦਾ ਹਰ ਕੀ ਹੁੰਦਾ ਹੈ ਕਿਉਂਕਿ ਉਹ ਮਾਇਆ ਨਹੀਂ ਹੈ ਮਾਇਆ ਕਰਕੇ ਸਾਨੂੰ ਸਰੀਰ ਕਰਕੇ ਅਸੀਂ ਜਿਹੜਾ ਸਰੀਰ ਨਹੀਂ ਹੈ ਉਹ ਨੂੰ ਅਸੀਂ ਵੀ ਬਣਦੇ ਹੈਗੇ ਹੁੰਦਾ ਹਨਾ ਕਿ ਜੀਵ ਨੂੰ ਹੀ ਹੈ ਜਗ ਜੀਵਨ ਕੀ ਹੈ ਜਿਹਨ ਹਰਸ ਵਿੱਚ ਵਿਚਰੇ ਗਿਆ ਉਹਦੇ ਕਰਕੇ ਇਸ ਇਹ ਨਹੀਂ ਅਸੀਂ ਵਿਚਾਰਿਆ ਵੀ ਸਰੀਰ ਨੂੰ ਜਿਉਂਦਾ ਰੱਖਣ ਵਾਲਾ ਤਾਂ ਉਹ ਆਪ ਹੈ ਜਿਹੜਾ ਵਿੱਚੋਂ ਨਿਕਲ ਗਿਆ ਜਿੱਦਾਂ ਚੋਂ ਵਿੱਚ ਸਰੀਰ ਜਿਉਂਦਾ ਹੈ ਉਹ ਨੂੰ ਬੜਿਆ ਤੁਸੀਂ ਮੰਨ ਲਓਗੇ ਤੁਸੀਂ ਉਹਨੇ ਹੋਰ ਸਰੀਰ ਦੀਆਂ ਗੱਲ ਲੈਣ ਇੱਥੇ ਗੁਰਜ ਹੈ ਉਹਦਾ ਜਨ ਜੀਵਨ ਹਰਪੁਰਖ ਨਾਲ ਸੇਵ ਪਰਨਾਮ ਤੇ ਆਈ ਹੈ ਉਹਦੀ ਜੇ ਸੇਵੀ ਹੈ ਉਹਨੂੰ ਸਮਝੀਏ ਜੋ ਹਰਪੁਰਖ ਦੀ ਅਵਸਥਾ ਪ੍ਰਾਪਤ ਕਰਨ ਵਾਸਤੇ ਜੋ ਉਹਨੇ ਕੀਤਾ ਉਹੀ ਆਪਾਂ ਕੰਮ ਕਰੀਏ ਆਹ ਹਰਨਾਮ ਦੇ ਵਿੱਚ ਆਹ ਨਾਮ ਦੇ ਵਿੱਚ ਆਪਾਂ ਸੇਹੀ ਹਰਪੁਰਖ ਮੌਜੂਦ ਹੁੰਦਾ ਪਰਨਾਮ ਕੀ ਹੁਕਮ ਹੈ ਹਰਨਾਮ ਹੁਕਮ ਜੇ ਤਿਆਨ ਰੱਖੋ ਹੁਕਮ ਨੂੰ ਬੁਝਣਾ ਪਾਣੀ ਦੇ ਵਿੱਚ ਚੱਲਣਾ ਪਾਣੀ ਨੂੰ ਬੁਝਣੋ ਕਬ ਗੂੰਜ ਪਰਮ ਪਦ ਪਾਈ ਜਿਉ ਗੁਜਨੇ ਆਇ ਤੈ ਇਹ ਉੱਤੇ ਕੋਈ ਵਸਤੈ ਨਹੀਂ ਹੈ ਹਾਂ ਤਾਂ ਸੰਤਾ ਤਾਂ ਸਾਜੂ ਲੱਗ ਹਰ ਲਾਂਖ ਕੇ ਸੰਸਾਰ ਨੂੰ ਛੱਡ ਕੇ ਧੂਤੀ ਮਾਇਆ ਨੂੰ ਛੱਡ ਕੇ ਜੇ ਗੁਰ ਕੇ ਪੈਂਦਾ ਦੁਆਰੇ ਆਤਮਾ ਨਾਲ ਗੁਰਜੈ ਜੇਹਰ ਤਰ੍ਹਾਂ ਆਤਮ ਦੀ ਆਵਾਜ਼ ਅੰਦਰ ਚੱਲਦਾ ਹੈ ਤਾਂ ਸਤ ਸੰਗਤ ਹੁੰਦੀ ਹੈ ਜੀ ਸਾਧੂ ਲੱਗੋ ਹਰ ਨਾਮ ਉਹੀ ਸਾਧੂ ਗੰਦਲਾ ਉਹਦੇ ਨਾਲ ਜੁੜ ਗਿਆ ਨਾਮ ਸੁਭਾਈ ਹੈ ਤਾਂ ਨੂੰ ਇਹਨੇ ਉਹ ਜਸਬੂਰ ਠੀਕ ਹੈ ਜੀ ਹਾਂ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਐ ਹਉ ਗੋਲਾ ਲਾਲਾ ਤੁਧ ਹਰ ਤੇਰੀ ਵੱਡੀ ਕਾਰ ਹੈ ਤੇਰੀ ਕਾਰ ਬਹੁਤ ਵੱਡੀ ਹੈ ਜਿਹੜੀ ਤੈਂ ਬੁਲਾਇਆ ਸਾਨੂੰ ਬਹੁਤ ਵੱਡਾ ਕੰਮ ਹੈ ਮੈਂ ਕਾਰ ਸੀ ਕੀ ਕੰਮ ਸੀ ਆ ਦੱਸਣਾ ਰਸਤਾ ਹਰ ਕਾ ਮਾਰਗ ਦੱਸਣਾ ਵੱਡਾ ਕੰਮ ਸੀ ਸਤਿ ਨੂੰ ਤੈਨੂੰ ਦੁਰਦਾ ਮੈਨੂੰ ਤਾਂ ਦੱਸ ਸਕੇ ਕਰਾ ਲਿਆ ਤੈਨੂੰ ਕਾਰੇ ਲਾਇਆ ਹੋਇਆ ਕੀ ਚੰਬ ਈਦਾ ਭਾਇਆ ਅਸਲ ਦੇ ਵਿੱਚ ਸਾਰ ਤੇਰੀ ਗੇ ਸੁਖਾ ਮੈਂ ਗੁਰਖ ਲਾਇਆ ਮੈਂ ਗੁਰਖ ਜਿਹੜਾ ਕਾਰੇ ਲਾ ਨਾ ਤਾਂ ਗੁਰਖ ਤੇਰੇ ਨਾਲ ਲੜੀ ਜਾਂਦਾ ਸੀ ਤੇਰੀ ਬਰਾਬਰੀ ਕਰਦਾ ਰਿਹਾ ਸੀ ਹਾਂਜੀ ਹਾਂਜੀ ਹਾਂ ਗੋਲਾ ਲਾਲਾ ਹੁੰਦਾ ਛੋਟਾ ਜਿਹਾ ਬੱਚਾ ਹਾਂਜੀ ਜੋ ਤੂੰ ਕਹਿਣਾ ਜੋ ਉਹ ਮੈਂ ਭੱਜ ਕੇ ਕਰ ਜੀ ਨੂੰ ਆਪਾਂ ਫੜਾਓ ਥੋੜਾ ਭੱਜਿਆ ਫਿਰਦਾ ਐ ਭੱਜਿਆ ਸਰਦਾ ਗੋਲਾ ਲਾਲਾ ਤੂੰ ਹਾ ਹੁਕਮ ਕਰੋ ਮਾਹੀਏ ਮੈਨੂੰ ਹੁਕਮ ਕਰ ਹੁਕਮ ਕਰਦਾ ਰਾਤੂ ਜੋ ਹੁਕਮ ਕਰੇਗਾ ਮੈਂ ਉਹਦੀ ਤਾਬਿਆ ਰਹੂਗਾ ਉਹ ਹੀ ਕਰੂਗਾ ਠੀਕ ਹੈ ਜੀ ਹਾਂ ਗੁਰਮੁਖੀ ਕਾਰ ਕਮਾਵਾਂ ਜੇ ਗੁਰ ਸਮਝਾਈਏ ਜੇ ਗੁਰ ਸੁਝਾਵੇ ਮੈਨੂੰ ਮੈਂ ਗੁਰਮੁਖੀ ਕਾਰ ਕਰਦਾ ਰੱਖਦਾ ਹੁਣ ਮੇਰੇ ਅੰਦਰ ਕੋਕ ਗੁਰਮੁਖੀ ਕਾਰ ਕਰਦੀ ਹੈਗੀ ਹੈ ਮੈਂ ਗੁਰਮੁਖੀ ਕਾਰ ਕਰਦਾ ਜੇ ਗੁਰ ਸਤਗੁਰ ਮੈਨੂੰ ਸੁਝਾਵੇ ਇਹ ਮੇਰੀ ਇੱਛਾ ਹੈਗੀ ਹੈ ਤੁਸੀਂ ਸਭ ਜਲਦੇ ਰਹੋ ਤੇ ਮੈਂ ਕਰਦਾ ਰਹਾਂ ਸਾਰੇ ਲੱਗਿਆ ਰਹੋ ਠੀਕ ਹੈ ਜੀ ਅ ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ